ਰੋਸ਼ਨਾ ਕੀ ਜੇ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਜੁ ਵਿਚਾਰੇ ਕੋਈ ਜੀ ਜੂਸਾ ਉਗਾਨਨ ਲੋਰੋਂ ਸੇ ਦੀ ਕੱਤ ਜਾਈਦਾ ਯਾਪੜੀ ਗੱਲ ਕਿਸੇ ਨੂੰ ਨਹੀਂ ਬੇਲ ਖਾਂਦੀ ਹਉਦਾ ਸੁਭਚਾਲ ਮੁਚਾਈਦਾ ਵਿਚਾਰ ਮੇਰੀ ਗੱਲ ਕੋਈ ਨਹੀਂ ਬੇਲ ਖਾਂਦੀ ਰੋਜ਼ ਰੋਲ ਉੱਭਰੋ ਤੇ ਪਿੱਛੇ ਆ ਨਹੀਂ ਮੈਂ ਤਾਂ ਸਾਧ ਦੇ ਵਿੱਚ ਰਹਿਣਾ ਜੇ ਸਦ ਜੀ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਚਾਏ ਜੁਗਚਾਰੇ ਆਏ ਨਾ ਜੁਗਚਾਰੇ ਚਾਰੇ ਜੁਗਾਂ उद्यांदर है रणधीर रणधीर तेगे कने माता जी ऐथे जुगतो की भाव है जी कब भाई जरूरी रहण कहण रहे न कोई किस पे करूं एक शब्द राम नाम निरोदर गुरुदेव है पत ਹੂੰ ਇਹ ਜੁੱਟਾਇ ਬਈ ਮੰਨੋ ਆਨੇ ਕਰੇ ਤੇ ਭਰਾਈ ਦੀ ਕੋਈ ਇਹਨਾਂ ਅੱਲੀ ਕੋ ਬੈਤਾਰੇ ਅੱਛਾ ਜੀ ਇਹ ਮਤਲਬ ਹੈ ਦੀ ਵਿੱਚ ਜਿੱਤੀ ਬੱਝਾਉਣਾ ਰਣਕਾਲਨ ਕੋਈ ਇਸ ਤਰ੍ਹਾਂ ਦੀ ਗਜੁਤੀ ਇਹਦੇ ਕੋ ਜਾ ਕੇ ਫਰਿਆਦ ਕਰੀਏ ਕਿ ਇਹ ਸਬਦ ਇੱਕ ਸਬਦ ਹੈਗਾ ਉਹ ਵਿਰੋਧਤ ਹੈ ਆਰਾਮ ਲੋਭ ਚਾਹੁੰਦਾ ਹੈ ਅਸਲ ਵਿੱਚ ਵਿਰੋਧਤ ਉਹ ਸਬਦ ਸਬਰ ਲੋਭ ਦਿੰਦਾ ਹੈ ਅਸਲ ਵਿੱਚ ਆਖੀ ਜੀ ਪਾਵਰ ਟੈਵਲ ਗੋਲ ਰੋਕ ਕੇ ਨਾ ਜਾਵੋ ਤੁਸੀਂ ਵੀ ਕਹੀ ਗੁਰਦੇਵ ਦੇ ਉਹ ਸਤਗੁਰੂ ਨੂੰ ਦੰਦ ਸਤਗੁਰ ਪਤੀ ਹੈ ਬੰਤ ਦੰਦ ਉਹਦੀ ਅਗਰੇ ਉਹ ਉਹ ਸ਼ਬਦ ਹੈਗਾ ਉਹ ਵਿਚਾਰ ਨਾਲ ਕਹੀ ਗੁਰਦੇਵ ਪਤ ਪਤਮਲ ਪਤੀ ਹੈ ਜੀ ਇੱਕ ਪਰਦਾ ਜ਼ੋਦੀ ਉਹ ਸਮਝਾਉਂਦਾ ਹੈ ਠੀਕ ਹੈ ਜੀ ਪਰਦਾ ਮਤਲਬ ਫਿਰ ਇੱਜ਼ਤ ਹੋ ਗਿਆ ਹਾਂ ਅੱਛਾ ਜੀ